पढ़ना गुणना संसार की कार है अंदर तृष्णा विकार ओमे विच सब पढ़ थक के दूजे पाए खवार संसार दी पढ़ते गुणदे नहीं वो नौकरियां संसारी उणदे तो पढ़दे सी जोती पढ़दे सी वैदिक पढ़दे सी ਇਹ ਸੰਸਾਰ ਦੀ ਕਾਰ ਪਿਆਰ ਵਾਸਤੇ ਪੜਦੇ ਲੋਕ ਸੰਸਾਰ ਕੀ ਕਾਰ ਹੈ ਠੀਕ ਕੀ ਮਾਇਆ ਵਾਸਤੇ ਪੜਦੇ ਨੇ ਤੇ ਤ੍ਰਿਸ਼ਨਾ ਤੇ ਇਹ ਜਿਹੜੀ ਹੈ ਵਿਕਾਰ ਹੈ ਵਿਕਾਰਾਂ ਦੇ ਵਿੱਚ ਸ਼ਾਮਲ ਹੈ ਤੇ ਲੋਕ ਤਾਂ ਪੜਾਈ ਵੀ ਕਰਦੇ ਨੇ ਵਿਕਾਰਾਂ ਵਾਸਤੇ ਕਰਦੇ ਨੇ ਬਾਕੀ ਪੜਦੇ ਸੀ ਕਿਪਰੰਤ ਪੜਾਉਣੀ ਸੀ ਉਸ ਵੇਲੇ ਉਹਨਾਂ ਦੀ ਗੱਲ ਹੈ ਹਾਂਜੀ ਹੁਮੇ ਵਿੱਚ ਸਭ ਪੜ ਥੱਕੇ ਦੂਜੇ ਭਾਏ ਖਵਾ ਹਮੇ ਦੇ ਸਾਰੇ ਪੜ ਪੜ ਕੇ ਖੱਤ ਨੇ ਦੂਜੇ ਭਾਏ ਮਾਇਆ ਦੀ ਭੁੱਖ ਰਹਿੰਦੀ ਦੀ ਭੁੱਖੀ ਤਾਂ ਖਵਾਰੀਓ ਖਾਰੀ ਹੈ ਵਾਸਤੇ ਨਹੀਂ ਲੋਕ ਪੜਦੇ ਹਣ ਪੜਾਈ ਜਿੰਨੀਆਂ ਪੜਾਈਆਂ ਨੇ ਸਕੂਲ ਕਾਲਜਾਂ ਦੇ ਵਿੱਚ ਸਾਰੀਆਂ ਮਾਇਆ ਵਾਸਤੇ ਬ੍ਰਹਮ ਗਿਆਨ ਉਹਦੀ ਤਾਂ ਪੜਾਈਓ ਪੜਾਈ ਜਾਂਦੀ ਸਕੂਲਾਂ ਸੰਸਾਰ ਦੇ ਲੋਕ ਯਾਰ ਆਜਾ ਲੋੜ ਨਹੀਂ ਹੈ ਗਲਤੀ ਤੁਮ ਗਿਆਨ ਦੀ ਲੋੜ ਨਹੀਂ ਸੰਸਾਰ ਨੂੰ ਲੋੜ ਹੈ ਤੁਮ ਸਾਰੀ ਪੜਾਈ ਦੀ ਜਿਹਨਾਂ ਸੰਸਾਰ ਅਨੁਸਾਰ ਚੱਲਦਾ ਹੈ ਜਿਹੜੀ ਪੜਾਈ ਨੂੰ ਸੋ ਪੜਿਆ ਸੋ ਪੰਡਤ ਬੀਨਾ ਕਰੇ ਵਿਚਾਰ ਕੋਈ ਪੜਿਆ ਹੋਇਆ ਉਹੀ ਪੰਡਤ ਹੈ ਉਹੀ ਦਾਣਾ ਦਾਣਾ ਆਦਮੀ ਹੈ ਦੂਨਾ ਆਦਮੀ ਹੈ ਸੁੰਦਰ ਆਦਮੀ ਹੈ ਜਿਹੜਾ ਗੁਰ ਸ਼ਬਦ ਦੀ ਵਿਚਾਰ ਕਰਦਾ ਜਿਹੜਾ ਗੁਰਮਤ ਪੜਦਾ ਹੈ ਜਿਹੜਾ ਆਤਮ ਗਿਆਨ ਪੜਦਾ ਉਹ ਪੜਿਆ ਹੋਇਆ ਸੰਦੇਸ਼ ਉਹ ਸੁੰਦਰ ਪੜਾਈ ਹੈ ਆਤਮ ਗਿਆਨ ਦੀ ਪੜਾਈ ਸੁੰਦਰ ਪੜਾਈ ਹੈਗੀ ਹੈ ਮਨ ਮਤਲਬ ਨਾਮ ਦੀ ਪੜਾਈ ਨਾਮ ਵਾਸਤੇ ਪੜਨਾ ਆਪਣੇ ਬਕਾਰਾਂ ਨੂੰ ਜਿੱਤਣ ਵਾਸਤੇ ਪੜਨਾ ਮਨ ਨੂੰ ਸਮਝਾਉਣ ਵਾਸਤੇ ਪੜਨਾ ਮਾਇਆ ਦੀ ਦੌੜ ਤੋਂ ਨਹੀਂ ਦੌੜ ਹਟਣ ਵਾਸਤੇ ਪੜਨਾ ਦੁਨੀਆ ਦੀ ਵਿੜਾਈ ਕਰਨ ਵਾਸਤੇ ਪੜਨਾ ਹਾਂਜੀ ਅੰਦਰ ਖੋਜੈ ਤਤ ਲਹੈ ਪਾਏ ਮੋਖ ਦਵਾਰ ਜਿਹੜੀ ਪੜ੍ਹਾਈ ਪ੍ਰਾਪਤੀ ਹੁੰਦੀ ਅੰਦਰ ਦੀ ਪੜ੍ਹਾਈ ਪੜ੍ਹੇ ਆਤਮਾ ਦੇ ਲੈਵਲ ਤੇ ਆਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰੇ ਆਤਮਾ ਦਾ ਦਰਸ਼ਨ ਕਰਨ ਦੀ ਕੋਸ਼ਿਸ਼ ਕਰੇ ਤਾਂ ਤਤ ਗਿਆਨ ਦੀ ਉਹੀ ਤਤ ਗਿਆਨ ਸਤਿ ਲਾਇ। ਭਾਈ ਮੁਖ ਦਵਾਰ। ਬਸ ਫਿਰ ਮੁਕਤੀ ਦਾ ਦਵਾਰ ਆ ਪਹੁੰਚਦਾ ਮੁਕਤ। ਮੁਕਤ ਹੋ ਜਾਂਦਾ। ਮੁਕਤੀ ਦੀ ਸਮਝ ਆ ਜਾਂਦੀ ਹੈ। ਠੀਕ ਪਤਾ ਲੱਗ ਜਾਂਦਾ ਗੁਰਤੀ ਦਾ ਮਾਰਗ ਦਾ ਪਤਾ ਲੱਗ ਜਾਂਦਾ। ਦਵਾਰੇ ਤੱਕ ਪਹੁੰਚੇ ਜਾਂਦਾ ਗੁਣ ਮੇ ਦਾਣ ਹਰ ਪਾਇਆ ਸਹਿਜ ਕਰੇ ਵਿਚਾਰ ਗੁਣ ਦਾਣ ਹਰ ਪਾਇਆ ਗੁਣ ਦਾਣ ਹੈ ਜਿਹੜਾ ਹਰ ਆਪਣਾ ਮੂਲ ਹੈ ਗੁਣ ਦਾਣ ਦਾਣ ਮਨ ਔਗਣ ਦਾਣ ਦਾਣ ਜਿਤਾ ਸਮੁੰਦਰ ਸਾਗਰ ਵੀਰ ਭਰਿਆ ਕਹਤੇ ਔਗਣ ਹਮਾਰੇ ਉਹ ਗੁਣ ਦਾਣ ਹੈ ਤੇ ਔਗਣਵੰਤਾ ਉਹ ਗੁਣਵੰਤਾ ਗੁਣ ਦਾਣ ਹਰ ਪਾਇਆ ਹਰ ਗੁਰਨਾਨ ਨੁ ਪਾਲੰਦਾ ਜਿਹੜਾ ਆਪਣਾ ਅੰਦਰ ਖੋਜਦਾ ਹੈ ਅੰਦਰ ਖੋਜਦਾ ਹੈ ਗੁਰਨਾਨ ਨੂੰ ਪਾਲੰਦਾ ਸਹਿਜ ਕਰੇ ਵਿੱਚ ਫਿਰ ਉਹ ਸਾਇਆ ਬਸਤਾ ਚੁੱਕ ਕੇ ਟਿੱਕੇ ਉਹ ਗਿਆਨ ਦਾ ਵਪਾਰ ਕਰਦਾ ਜੋ ਖੋਜ ਲੈਂਦਾ ਉਹ ਦੱਸਦਾ ਸਮਝਾਉਂਦਾ ਜੋ ਖੋਜਦਾ ਹੈ ਅੰਦਰ ਉਹ ਫਿਰ ਦੱਸਦਾ ਸਮਝਾਉਂਦਾ ਮਾਰਗ ਸਮਝਾਉਂਦਾ ਹਾਂਜੀ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਉਹ ਗੁਰਮੁਖ ਵਪਾਰੀ ਧੰਨ ਨੇ ਜਿਹੜੇ ਨਾਮ ਦਾ ਹੀ ਆਧਾਰ ਰੱਖਦੇ ਨੇ ਨਾਮ ਤੇ ਟੇਕ ਰੱਖਦੇ ਨੇ ਬਾਕੀ ਸਰੀਰ ਦਾ ਤਾਂ ਦੇਣ ਵਾਲਾ ਦਾਤਾ ਹੈ ਸਾਰਿਆਂ ਨੂੰ ਦੁੱਧਾ ਆਧਾਰ ਉਹਨਾਂ ਨੇ ਨਾਮ ਦਾ ਰੱਖਣਾ ਸਰੀਰ ਦੀ ਤਾਂ ਡਿਊਟੀ ਪਰਮੇਸ਼ਰ ਦੀ ਹੈ ਇਹਨੂੰ ਦੇਣਾ ਇਹ ਆਦਮੀ ਦੀ ਜ਼ਿੰਮੇਵਾਰੀ ਕ੍ਰਿਮਤੀ ਦੀ ਜ਼ਿੰਮੇਵਾਰੀ ਹੈ ਸਾਡੀ ਤਾਂ ਜੋ ਮਿਲ ਗਿਆ ਖਾ ਲਿਆ ਜੋ ਪਹਿਨ ਲਿਆ ਕ੍ਰਿਮਤੀ ਪੂਰੀ ਜ਼ਿੰਮੇਵਾਰੀ ਪਰਮੇਸ਼ਰ ਦੀ ਹਾਂਜੀ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਜਿਹੜੇ ਗੁਰਮੁਖਾਂ ਨੂੰ ਨਾਮ ਦਾ ਹੀ ਆਧਾਰ ਹੈ ਆਪਣੇ ਬਾਗ ਦੀ ਤੇ ਮਾਇਆ ਦੀ ਕ੍ਰਿਮਤੀ ਦੀ ਜ਼ਿੰਮੇਵਾਰੀ ਨਹੀਂ ਤਨ ਵਪਾਰੀ ਉਹ ਵਪਾਰ ਤਾਂ ਨਾ ਉਹ ਨਾਮ ਦਾ ਵਪਾਰ ਜਿਹੜੇ ਕਰਨ ਵਾਲੇ ਨੇ ਉਹ ਲੋਕ ਤਾਂ ਨਹੀਂ ਬਾਕੀ ਸੰਸਾਰੀ ਰਸਤੇ ਨਾਲ ਵਪਾਰ ਕਰਨ ਵਾਲੇ ਕਿੱਡੇ ਵੀ ਵੱਡੇ ਵਪਾਰੀ ਹੋਣ ਇਹ ਸਾਨੂੰ ਤੀਜਾ ਮਾਰੇ ਕੋਈ ਨਾ ਸਿੱਝਈ ਵੇਖੋ ਕੋਲੇ ਤੇ ਮਨ ਕਿਹੜੀ ਫੋਜੀ ਨਹੀਂ ਆਈ ਅਜ ਤੱਕ ਨਾ ਆਵੇ ਕਿਹਦੀ ਟਾਣੀ ਉੜ ਜੀ ਹੋਈ ਨਹੀਂ ਸੁਣ ਜੀ ਇਹ ਜਿਹੜੀ ਹੈ ਨਾ ਕੁੰਡਲਨੀ ੁਰਜੀ ਹੋਈਆ ਇਹ ਕੁੰਡਲਨੀ ੁਰਜੀ ਸਤ ਸੰਗਤ ਸਤ ਸੰਗਤ ਨਹੀਂ ਕਰਦਾ ਮਨ ਸਮਝਾਏ ਤੇ ਬਿਨੋ ਮਰੇ ਤੇ ਬਿਨੋ ਸਤ ਸੰਗਤ ਨੂੰ ਬੁੱਧੀ ਦੀ ਜਿਹੜੀ ਹੈ ਧਰਮ ਦੀ ਧਰਮ ਦੂਰ ਨਹੀਂ ਹੁੰਦਾ ਬੰਨੀ ਮਰਦਾ ਬਨੋ ਸਤ ਸੰਗਤ ਸੇ ਬਿਨਾ ਸਮਝਾਏ ਤੇ ਵਿਣ ਮਨ ਮਾਰੇ ਕੋਈ ਨਾ ਸਿਜਈ ਵੇਖੋ ਕੋਲੇਵ ਲਾਈ ਕੋਈ ਲੇਵਲਾ ਕੇ ਦੇਖ ਲੋ ਲੇਵ ਲਾਈ ਜਾਂਦੇ ਮਨ ਤੱਕ ਇਸ ਦਾ ਮਰੇ ਹੀ ਨਹੀਂ ਵੀਰ ਵੀ ਇਹ ਕਹਿੰਦਾ ਮੋਢੀ ਕਿਉਂ ਨਾ ਮੋਇਓ ਮੈਂ ਮਾਰਾ ਫੇਰ ਤਾਂ ਮੇਰਾ ਮਨ ਕਿਉਂ ਨਹੀਂ ਮਰਿਆ ਕਿਉਂ ਨਹੀਂ ਰੁਕਿਆ ਪਰਨਾ ਮਤਲਬ ਰੁਕਿਆ ਕਿਉਂ ਨਹੀਂ ਖੜਿਆ ਕਿਉਂ ਕਿਉਂ ਹੀ ਚਲਾਇ ਮਰਨੇ ਮਨ ਉਹ ਵੀ ਝਮਾਤੀ ਲਾਉਂਦੇ ਨੇ ਕੋਈ ਮਾਲਾ ਫੇਰਦੇ ਮਨ ਨਹੀਂ ਰੁਕ ਰਿਹਾ ਕਿਥੇ ਦਾ ਵੀ ਮਨ ਜੀ ਆ ਮਨ ਮਨ ਜਾਨਾ ਜਿਹੜਾ ਮਰ ਜਾਣਾ ਮਨ ਮਾਰਿਆ ਮਾਰਿਆ ਜਾ ਸਕਦਾ ਹੈ ਲੋਕਾਂ ਨੇ ਬਣਾ ਲੇ ਥੱਕ ਕੇ ਤੇਗ ਮਹਾ ਬਣਾ ਕੇ ਕਿਤੇ ਕਹਿੰਦੇ ਕੋਬ ਕੋਬ ਕੇ ਥੱਕ ਗਏ ਮਾਲਾ ਫੇਰ ਕੇ ਥੱਕ ਗਏ ਸੁਨਾਦੀਆਂ ਲਾ ਕੇ ਥੱਕ ਗਏ ਪੀਰ ਤੇ ਕਰਕੇ ਥੱਕ ਗਏ ਇਹ ਮਨ ਨਹੀਂ ਕਿਸੇ ਦਾ ਰੁਪਿਆ ਮਨ ਮਾਰਿਆ ਨਹੀਂ ਜਾਂਦਾ ਕੋਈ ਕਿ ਜਿੰਨੇ ਜਿੰਨੇ ਕੁ ਰੁਪਏ ਜਿੰਨੇ ਮਨ ਮਾਰਨ ਦੇ ਭਗਤੀ ਦੇ ਕੁਰਤੀਰ ਤੇ ਸਾਰੇ ਹੀ ਫੇਲ ਨੇ ਕਹਿਣਾ ਮਤਲਬ ਇਹ ਹੈ ਮਨ ਨਹੀਂ ਮਾਰਿਆ ਗਿਆ ਕਿਸੇ ਮਨ ਨਹੀਂ ਰੁਕਿਆ ਕਿਸੇ ਦਾ ਨਹੀਂ ਮਤਲਬ ਹੈ ਇਹ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਇ ਗੁਰਮੁਖਾਂ ਦਾ ਮਨ ਜਿਉਂਦਾ ਹੀ ਹੁੰਦਾ ਮਰਦਾ ਨਹੀਂ ਇਹ ਜੀਵਤ ਮਰਦਾ ਮਨ ਦਾ ਮੰਦਾ ਕੀ ਮਰਦਾ ਮਨ ਜਿਹੜਾ ਬੇਕਾਬੂ ਹੋਇਆ ਭੱਜਦਾ ਉਹ ਹਟ ਜਾਂਦਾ ਮਾਇਆ ਦੀ ਮਗਰ ਭੱਜਣ ਤੇ ਹਟ ਜਾਂਦਾ ਮਾਇਆ ਦੀ ਕਲਪਨਾ ਕਰਨ ਤੋਂ ਹਟ ਜਾਂਦਾ ਸ਼ਾਂਤ ਬੈਠ ਕੇ ਬਹਿ ਆ ਜਾਂਦਾ ਭਾਣੇ ਚ ਜੋ ਦੇਣਾ ਸੋ ਜੋ ਤੂੰ ਦੇਵੇਂ ਉਹ ਠੀਕ ਹੈ ਸਾਰੇ ਸਾਰੇ ਯਤਨ ਨਹੀਂ ਕਰਦਾ ਕੋਈ ਪਾਣੇ ਦਾ ਜੰਗ ਗੁਰ ਤੇ ਪਾਣੇ ਆਉਣਾ ਹੀ ਮਰਨਾ ਹੈ ਦਾ ਆਪਣਾ ਪਾਣ ਦਾ ਤਿਆਗ ਹੀ ਮਰਨਾ ਹੈ ਆਪਣੀ ਮਰਜ਼ੀ ਦਾ ਤਿਆਗ ਹੀ ਮਰਨਾ ਹਾਂਜੀ ਸੱਚ ਰਹੇ ਲਿਵ ਲਾਏ ਸੱਚ ਨਾਲ ਲੱਗਿਆ ਨੇ ਤੇ ਸੱਚ ਨੂੰ ਜੁੜ ਕੇ ਰਹਿੰਦੇ ਨੇ ਇਸ ਤਰ੍ਹਾਂ ਫਿਰ ਮਨ ਮਾਰਿਆ ਜਾਂਦਾ ਹੈ ਮਾਇਆ ਨੂੰ ਹੜ ਜਾਂਦਾ ਜਾਂ ਮਾਇਆ ਤੇ ਉੱਠਣ ਜੜਦਾ ਤਾਂ ਢੋਲ ਲੈਣ ਆ ਢੋਲਣੀ ਮਾਇਆ ਰੰਗ ਜੁੜਿਆ ਮਨ ਢੋਲਦਾ ਜਾਂ ਮਾਇਆ ਨੂੰ ਛੱਡ ਕੇ ਸੱਚ ਨੂੰ ਜੁੜਦਾ ਤੂੰ ਢੋਲ ਹੋ ਜਾਂਦਾ ਢੋਲ ਹੋਣੀ ਹੰ ਲੈਦਾ ਨਾਨਕ ਇਸ ਸ਼ਬਦ ਜਲਾਇ ਮਨ ਦੀ ਮੈਲ ਇਸ ਤਰੀਕੇ ਨਾਲ ਉੱਤਰ ਜਾਂਦੀ ਹੈ ਮਾਇਆ ਦੀ ਭੁੱਖ ਉੱਤਰ ਜਾਂਦੀ ਹੈ ਮਨ ਦੀ ਮੈਲ ਉੱਤਰ ਜਾਂਦੀ ਹੈ ਵੀ ਗੱਲ ਹਾਂ ਹੋਮੈ ਸ਼ਬਦ ਜਲਾਇ ਦੀ ਜਿਹੜੀ ਵੀ ਮੈਂ ਕੁਝ ਕਰ ਸਕਦਾ ਹਾਂ ਹੋਮੈ ਜਿੰਨਾ ਜਿਹੜੇ ਮਨ ਦਾ ਨਾ ਕੁਝ ਕਰ ਸਕਦਾ ਉਹ ਮੈਂ ਤੇ ਬਤਾ ਵੀ ਜਦੋਂ ਉਹ ਜਦੋਂ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ ਫੇਟਿਕ ਕਰ ਸਕਦਾ ਜਦੋਂ ਮੈਨੂੰ ਇਹ ਪਤਾ ਲੱਗਿਆ ਉਹ ਜੋ ਹੁਣ ਹੁਕਮ ਨਾਲ ਉਹਨਾਂ ਫੇਟਿਕ ਜਾਂਦਾ ਕਰਦਾ ਤਾਂ ਹੈ ਪਰ ਕਰਮ ਕਰਤਾ ਹੋਏ ਵੀ ਕਾਮਯਾਬੀ ਹੋ ਜਾਂਦਾ ਫਿਰ ਕਰਦਾ ਹੋਇਆ ਵੀ ਤੁਮਨਾ ਕੋਈ ਨਹੀਂ ਦਈ ਪਤਾ ਨਹੀਂ ਉਹ ਜੋ ਕੀ ਮਿਲਣਾ ਕੀ ਨਹੀਂ ਮਿਲਣਾ ਜੋ ਬਿਰੂ ਬਿਰੂ ਨਾਰਮਲ ਮਾਦਾ ਸਮਝੂੜ ਕਰਦਾ ਹਾਂ ਹਾਂ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੜਾਵੋ ਇੱਕ ਕਿਣਕਾ ਹਰ ਹਰ ਸੰਤ ਕਿਣਕੇ ਜੰਨਾ ਨਾਮ ਕਰ ਲੋ ਬਥੇਰਾ ਥੋੜਾ ਜਾਈ ਕਰ ਲੋ ਬਹੁਤ ਆਲੀ ਹੈ ਨਾਮ ਵੱਡਾ ਬਹੁਤ ਦੁਨੀਆ ਭਰ ਦੇ ਕਿਉਂ ਦਾ ਜਵਾਬ ਨਹੀਂ ਸਾਡੇ ਕੋਲ ਹੈਗਾ ਸਾਨੂੰ ਤਾਂ ਇੰਨਾ ਹੀ ਹੈ ਵੀ ਅਸੀਂ ਇੱਥੇ ਸੰਸਾਰ ਤੋਂ ਆਪਣੇ ਘਰ ਸੁਖਸਾਂਦਣਾ ਕੋਲ ਜਾਣ ਵਾਪਸ ਕਿਸੇ ਗਲਤੀ ਕਰਕੇ ਅਸੀਂ ਵਿਛੜੇ ਹੋਏ ਆਪਨੇ ਮੂਲ ਨੂੰ ਆਪਣੇ ਮੂਲ ਨਾਲ ਕਿਵੇਂ ਜੋੜਦੇ ਥੋੜਾ ਜਿਹਾ ਗਿਆਨ ਉਹ ਲੰਬਾ ਚੌੜਾ ਨਹੀਂ ਹੈ ਇੱਕ ਏ ਕਿੰਕਾਏ ਕਿ ਜਿਸ ਜੀਵਸਾਵਾ ਸਾਥੀ ਮਨੋਂ ਗਣੀ ਨਾ ਹੋਵੇ ਇਕੜ ਕੇ ਜਨੈ ਗਿਆਨੜ ਬਥੇਰਾ ਦੁਨੀਆ ਵਰਦਾ ਗਿਆਨ ਸਾਨੂੰ ਲੋੜ ਨਹੀਂ ਹੈ ਬਿਲਕੁਲ ਹਰ ਹਰ ਸ਼ਿੰਗਾਰ ਬਣਾਓ ਹਰ ਜਨ ਹਰ ਕਾਪੜ ਪੈਰੋ ਖਿੰਮ ਕਾ ਹਾਂ ਹਰ ਕਾਪੜ ਪਹਿਰੋ ਖਿੰਮ ਹਰ ਹਰ ਹਰ ਵਰਗਾ ਸ਼ਿੰਗਾਰ ਬਣਾ ਲਓ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਮੇਰਾ ਸ਼ਿੰਗਾਰ ਬਣਾ ਲਓ ਦਾ ਮਤਲਬ ਹੈ ਬਾਹਰਲਾ ਸ਼ਿੰਗਾਰ ਨਾ ਬਣਾਓ ਮੇਰਾ ਸ਼ਿੰਗਾਰ ਕੀ ਹੁੰਦਾ ਹਰ ਵਰਗੇ ਕੋਣ ਧਾਰਨ ਕਰ ਲੋ ਇਹ ਗੋਲ ਰੇ ਨਾ ਜਿਮਾਰ ਹੈ ਇਹਨੇ ਹੋਰਨੇ ਰੂਪ ਬਣਾਉਂਦੇ ਨੇ ਗੋਲੇ ਦਾ ਰੂਪ ਬਣਾਉਂਦੇ ਨੇ ਸੁੰਦਰ ਬਣਾਉਂਦੇ ਨੇ ਇਹ ਜਿਹੜਾ ਆਤਮਾ ਦਾ ਰੂਪ ਹੈ ਇਹਨੂੰ ਸੁੰਦਰ ਕਿਵੇਂ ਹੋਊਗਾ ਹੈ ਤੁਹਾਡੇ ਦਾ ਕਿਵੇਂ ਬਣੂ ਗੋਲ ਨਾਲ ਬਣੂਗੇ ਮੇਰੇ ਵੈਰ ਹੋ ਜਾਓ ਠੀਕ ਹਰ ਕਾਂਪੜ ਪਹਿਰੋਂ ਖਿਮ ਕਾ ਦਾ ਕਪੜਾ ਪਹਿਨੋ ਕੋ ਮਾਇਆ ਤਿਆਗ ਮਾਫ ਕਰ ਦੇਣਾ ਸਭ ਨੂੰ ਯਾਗੇ ਦਾ ਤਿਆਗੋ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੇ ਪਿਆਰਾ ਪ੍ਰੇਮ ਕਾ ਐਸਾ ਜਿਹੜਾ ਅਸੀਂ ਕੋ ਨਾ ਸਰੀਰ ਤੇ ਦੇਖ ਇੱਥੇ ਤੇ ਤੇਦਾ ਲੱਗਦਾ ਬਰਗਾ ਦੇ ਵਿੱਚ ਅੰਦਰਲਾ ਨਹੀਂ ਇੱਥੇ ਬਾਹਰਲੇ ਤਾਂ ਹੋਰ ਹੀ ਗੁੰਝਾਰ ਕੇ ਰਹੇ ਨੇ ਤਾਂ ਹੈ ਵਦ ਇਹ ਤਾਂ ਸੰਸਾਰ ਦੇ ਲੋਕਾਂ ਨੂੰ ਆਪਣੇ ਆਪ ਨੂੰ ਬਖਰਾ ਵਿਚਾਰੇ ਸੰਸਾਰ ਦੀ ਮੱਤਾਂ ਨੂੰ ਯਾ ਮਤ ਬਖਰੀਏ ਬਖਰੀਏ ਸਾਡੀ ਬਖਰੀਏ ਇਹ ਤਾਂ ਜਿਹੜਾ ਬਾਹਰੋਂ ਭੇਜਿਆ ਇਹ ਤਾਂ ਸੰਭਾਲਣਾ ਅਸੀਂ ਆਪਣੇ ਆਪ ਨੂੰ ਵੱਖਰਾ ਕੀਤਾ ਫੌਜ ਦੀ ਵਰਦੀ ਹੈ ਸਾਡੀ ਹਾਂਜੀ ਹਰ ਲੱਗੇ ਪਿਆਰਾ ਪ੍ਰੇਮ ਪ੍ਰੇਮ ਦਾ ਗੁਣਾ ਇਹੀ ਪਿਆਰਾ ਲੱਗਦਾ ਮੇਰੇ ਖਾਂ ਨੂੰ ਇਹ ਪ੍ਰੇਮ ਨਹੀਂ ਕਰਦਾ ਸਭ ਨੂੰ ਇਹ ਸਾਰੇ ਆਪਣੇ ਇਹਨਾਂ ਬਗਾਨਾ ਕੋਈ ਨਹੀਂ ਹੈ। ਉਹੀ ਦਰਗਾਹ ਦੇ ਵਿੱਚ ਪ੍ਰਮਾਨ ਹੈ। ਜਿਹੜਾ ਜੋਈ ਉਹਦੀ ਭਗਤੀ ਕਬੂਲ ਹੈ, ਉਹੀ ਕਬੂਲ ਹੈ। ਉਹੀ ਉਹਦਾ ਹੀ ਰੂਪ ਕਬੂਲ ਹੈ, ਉਹਦਾ ਰੰਗ ਕਬੂਲ ਹੈ। ਉਹਦਾ ਹੀ ਕਿਨਾਰ ਕਬੂਲ ਹੈ ਜਿਹਦੇ ਅੰਦਰ ਪ੍ਰੇਮ ਜਨ ਪ੍ਰੇਮ ਕੀ ਉਹ ਤੇ ਹਾਂਜੀ। ਹਰ ਹਰ ਨਾਮ ਬੋਲੋ ਦਿਨ ਰਾਤੀ। ਸਭ ਕਿਲਵਿਖ ਘਟ ਹੈ ਇੱਕ ਪਲਕਾ। ਇੱਕ ਪਲ ਦਾ ਬੋਲਿਆ ਹੋਇਆ ਇੱਕ ਦਿਨ ਸਾਰੇ ਕੱਟ ਦਿੰਦਾ ਉਹ ਗਣ ਹਰ ਹਾਲ ਨਾਮ ਤੋਂ ਪਰ ਦਿਨ ਰਾਤ ਹੀ ਹਰ ਨਾਮ ਹੀ ਬੋਲਣਾ ਚਾਹੀਦਾ ਦਿਨ ਰਾਤ ਹੀ ਗੁਰਮਤਿ ਗੱਲ ਨੂੰ ਛੱਡ ਕੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਇੱਕ ਪਲ ਦਾ ਬੋਲਿਆ ਹੋਇਆ ਕੱਟ ਦਿੰਦਾ ਹੈ ਜੰਕੀ ਫਾਸੀ ਕੱਟ ਦਿੰਦਾ ਇੱਕ ਵਾਰ ਦਾ ਬੋਲਿਆ ਹੋਈ ਪਰ ਫੇਰ ਵੀ ਬੋਲਦੇ ਰਹਿਣਾ ਚਾਹੀਦਾ ਨਾ ਬੋਲਣਾ ਜੇ ਕਰਦੇ ਫੇਰ ਉਹ ਸਾਵੀ ਹੋ ਜਾਂਦੇ ਨੇ ਫਿਰ ਮਨ ਆਪ ਦੇ ਕਾਬੂ ਹੋ ਜਾਂਦਾ ਮਨ ਕਿ ਫੇਰ ਕਲਪਨਾ ਸ਼ੁਰੂ ਹੋ ਜਾਂਦੀ ਹੈ ਹਰ ਵਿਚਾਰ ਦਾ ਇੱਕ ਹੋਰ ਹੀ ਫੇਰ ਸ਼ੁਰੂ ਕਰ ਹਾਂਜੀ ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਣਕਾ ਜਿਹਦੇ ਤੇ ਹਰ ਦਇਆਲ ਹੋ ਜਾਂਦਾ ਉਹ ਗੁਰਮੁਖ ਜਦ ਹਰ ਜਪਦਾ ਤਾਂ ਉਹ ਜੋ ਮਨ ਨੂੰ ਜਿੱਤ ਲੈਂਦਾ ਬਣੇ ਉਹ ਬਾਜੀ ਜਿੱਤ ਲੈਂਦਾ ਉਹ ਮਤਲਬ ਜਨਮ ਪਦਾਰਥ ਜਿੱਤ ਲੈਂਦਾ ਜਿੰਨ ਦਾ ਹਰ ਬਿਆਲ ਹੋ ਗਏ ਫਿਰ ਹਰਕਤੇ ਫਿਰ ਮਨ ਜਿੱਤ ਲੈਂਦਾ ਹਾਂਜੀ ਇਹ ਕੀ ਐਥੇ ਕਿਵੇਂ ਹੈ ਜੀ